ਹਾਂਜੀ ਗਾਵੇਗੁਣ ਮਹਾਦੇਵ ਬੈਰਾਗੀ ਜਿਹਨੇ ਧਿਆਨ ਨਿਰੰਤਰ ਜਾਣਿਓ ਮਾੜੇ ਪਰ ਅੰਮੀ ਜਿਹੜਾ ਹੈਗਾ ਸਿਰਫ ਜਿਹਨੂੰ ਕਹਿ ਲਵੇ ਹੂੰ ਹੂੰ ਕੋਈ ਬੈਰਾਮੀ ਪਰ ਆਗਾਕਾਰ ਵਰਗਾ ਜਿਹਨੇ ਗੁਣ ਕੋਨਾ ਪਰ ਜਾਣਿਆ ਗਿਆ ਬਸ ਧਿਆਨ ਲਾਓ ਧਿਆਨ ਕਰੋ ਅੱਛਾ ਜੀ ਤਾਂ ਨਵਾਂ ਤਾਂ ਧਿਆਨ ਕਰੀਏ ਕੋ ਪਰ ਗਿਆਨ ਤੇ ਆਪਦੀ ਗੱਲ ਨਹੀਂ ਕਰਦਾ ਇਕੱਲੇ ਤੇ ਆਸ ਦੀ ਗੱਲ ਕਰਦਾ ਕੁਰਬਾਨੀ ਗਿਆਨ ਪਹਿਲਾਂ ਧਿਆਨ 바 ਦੀ ਗੱਲ ਕਰਦੀ ਹੈ ਉਹ ਗਿਆਨ ਤੋਂ ਬਿਨਾਂ ਧਿਆਨ ਦੀ ਗੱਲ ਕਰਦਾ ਠੀਕ ਗਿਆਨ ਦੀ ਉਹ ਤੇ ਨਹੀਂ ਆ ਸਕਦਾ ਇਸ ਕਰਕੇ ਉਹ ਕਾਮਯਾਬੀ ਹੋਇਆ ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਦੀ ਉਹ ਤੁਹਾਡੇ ਧਿਆਨ ਚ ਆ ਜਾਵੇ ਪੋਸੀਬਲ ਹੈ ਦੀ ਠੀਕ ਹੈ ਇਹ ਉਹ ਗਿਆਨ ਨਹੀਂ ਉਹ ਤੇ ਹੂੰ ਜੇ ਨੂੰ ਜਾਣਦੇ ਆ ਇਤਿਹਾਸ ਤੋਂ ਦੱਸ ਸਕਦੇ ਸੀ ਕਿ ਠੀਕ ਹੈ ਹਾਂਜੀ ਚਲੋ ਕਭੀ ਕੱਲ ਸੁਜਸ ਗਾਵੋ ਗੁਰਨਾਨਕ ਰਾਜਯੋਗ ਜਨਮਾਨਿਓ ਹਾਂਜੀ ਇਹਦਾ ਬੇਟਾ ਸੈਨਾ ਉਹ ਵੀ ਜਿੰਦਾ ਗਿਆ ਠੀਕ ਹੈ ਜਿਹੜਾ ਖਿਆਲ ਇਹਦਾ ਜਾਏ ਨੇ ਗੋਲ ਰੋਟੇ ठीक है भाई जाड्या री री बोलण से जाड़े ठीक है जी राज योग मानियों बसियो निर्वैर रिदंतर राज जी राज योग जाड्या निर्वैर रिदंतर राज ज्ञान इते जा हो जावे हम्म ਕਿਰ ਰਾਜੋਗ ਹੋਰ ਹਰਲਾ ਬੋਲਣਾ ਵਰਤਦਾ ਹੈ ਪ੍ਰਾਪਤੀ ਹੋਈ ਹੈ ਸਮਾਰੀ ਹੋ ਕੇ ਹਿਰਦੇ ਬਾਰੇ ਜੇ ਬੋਲਣਾ ਵਰਤਦਾ ਹੈ ਉਹ ਰਾਗ ਤੇ ਹਿਰਦੇ ਜਿਹੜੇ ਵਾਲ ਨਹੀਂ ਬਗਿਆ ਆਪ ਰਿਵਾਇਲ ਹੋ ਗਿਆ ਮਾਨੇ ਬੈਲਗੁਰੂ ਛੱਡ ਕੇ ਹਿਰਦੇ ਕਿ ਹਾਂ ਅੱਛਾ ਜੀ ਬੰਦੇ ਬੰਦੋ ਕਹਿਣ ਤਾਂ ਹੂੰ ਹੂੰ ਸੋਧ ਲਈ ਕਰਦੇ ਆ ਨਾ ਵੀ ਜਿਹੜੇ ਨਾਲ ਹੂੰ ਹੂੰ ਉਹ ਬਾੜੀ ਕਿਤਾਬਾਂ ਚੁੱਕੀ ਤੇ ਮੈਂ ਕਿਸੇ ਨਾਲ ਬਾਹਰ ਵੀ ਗੱਲ ਕਰਿਆ ਆਂ ਆਹ ਜੀ ਕਿ ਦੂਜੇ ਕਹਾ ਕਿ ਆ ਜੀ ਜੀ ਬੀ ਆ ਰਿਹਾ ਜੀ ਜੀ ਇਹਨਾਂ ਤੋਂ ਮਾੜੀ ਕਿਤੇ ਜੀ ਹੂੰ ਪ੍ਰਮਾਣ ਚ ਲਾ ਕੇ ਆਉਂਦਾ ਅੱਛਾ ਤੁਸੀਂ ਅੰਦਰ ਹੋ ਗਿਆ ਬਾਹਰ ਸੀ ਕਿ ਪਹਿਲਾਂ ਹਾਂਜੀ ਹੁਣ ਠੀਕ ਹੈ ਜੀ ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ ਅੰਦਰ ਚਲੇਗੇ ਤੁਸੀਂ ਅੱਛਾ ਥੋੜਾ ਜਿਹਾ ਬਾਹਰ ਆ ਜੀ अह इथे पण आवाज थोडी सिग्नल कट हां जी हां मान्यो बस्यो निर्वैर रिदंतर सृष्टि सगल उदरी नाम लेतरयो निरंतर हृदय विच काकडे बाहेर ਆਰੇ ਸ੍ਰਿਸ਼ਟੀ ਦਾ ਆਰਦੇਸੋ ਸੁਦਾ ਹੁਮ ਹਮ ਇਸ ਸਗਲ ਉਦਰੀ ਨਾਮ ਲੈ ਤਰੇ ਨਾਮ ਉਦਰੀ ਸ੍ਰਿਸ਼ਟੀ ਸਗਲ ਉਦਰੀ ਨਾਮ ਲੈ ਤਰੇ ਉਹ ਨਿਰੰਤਰ ਨਾਮ ਲੈ ਤਰੇ ਉਹ ਨਿਰੰਤਰ ਕਿੱਥੇ ਕਰਦੇ ਸਾਦੇ ਸ੍ਰਿਸ਼ਟੀ ਦਾ ਆਰਦੇਸੋ ਹੁਦਾ ਇਹਨਾਂ ਨਾਮ ਲੈ ਲਤਾ ਇਹਨਾਂ ਗਿਆਨ ਆਸਵ ਚੱਲਦਾ ਕੋਣ ਪਤਾ ਹੁੰਦਾ ਜੈਗਾਂ ਤੱਕ ਇੱਕ ਇੱਕ ਦੇ ਕੋਈ ਵੀ ਹੈ ਇਦਾਂ ਇੱਕ ਦਾ ਉਦਾਹਰਣ ਹੈ। ਅੱਛਾ ਜੀ। ਇਸ ਤਰ੍ਹਾਂ ਦਾ ਤਰੀਕਾ ਹੈ ਬਰੂ ਰੋਲ ਛੱਡ ਕੇ ਮਨ ਦੇ ਵਿੱਚ ਹੀ ਜੁੜ ਜਾਦਾ ਹੈ ਤਾਂ ਕਰ ਕੇ ਨਾਲ ਰਿਆ ਹੋਊਗਾ। ਠੀਕ ਹੈ ਸਾਰੀ ਸ੍ਰਿਸ਼ਟੀ ਉਦਰੀ ਨਾਮ ਲੈ ਕੇ ਵੀ ਕਰ ਦੱਲਦੇ ਵੀ ਠੀਕ ਹੈ ਜੀ। ਹਾਂ हां जी गुण गावह सनकाद आद जनकाद जुगह लग तन अपने सबे ठीक है ठीक है से हां जी तन गुरु हरे बोल दे रे ठीक है जी तन तन गुरु तन जन्म सकयत अलौ जग ਕਿਆਤ ਸਕੇਤ ਹਾਂਜੀ ਕਿਆਤ ਪਲੋ ਜੱਗ ਹੂੰ ਹੂੰ ਪਲੋ ਜੱਗ ਹਾਂ ਪਨਤਾਰ ਗੋੜ ਹੂੰ ਹੂੰ ਹੋ ਗੁਰਦੇਵ ਹੋ ਗੁਰ ਹੂੰ ਹੂੰ ਅਦਕਾ ਦੇ ਹੂੰ ਹੂੰ ਕੋਈ ਜਿੱਕਾਂ ਤਾਰ ਦੇ ਹੂੰ ਹੂੰ ਉਹਦਾ ਜਨੂ ਕਿ ਕਿਆਤ ਬਾਹਰ ਤੋਂ ਗਿਆ ਹੂੰ ਹੂੰ ਕੁਦਾ ਜਾਲੋ ਮਤਲਬਾ ਉਹਨੇ ਜਿਹੜੀ ਪ੍ਰਦਾਨ ਖਤਮ ਹੋ ਆ ਹੂੰ ਜਿਹੜਾ ਸਪਾਸ ਫਾਦ ਵਾਸਤੇ ਸਾਰੇ ਸਾਰਦੇ ਭਰੇ ਵਾਸਤੇ ਜਿਹੜਾ ਹੂੰ ਸਾਰਦੇ ਸਵੇਰ ਵਾਰ ਤੇ ਜਿਹਨ ਸਾਰਾ ਜਬ ਬਾਕੀ ਦਾ ਬੀਤ ਜੀ ਹਾਂ ਆਹ ਵੇ ਪੜਾਉਣਾ ਚਾਹੀਦਾ ਜੀ ਅਪਨਾਂ ਦਾ ਕਰ ਲਿਆ ਬਣਾ ਇਹਨੂੰ ਇਹਨੂੰ ਬਦਸ਼ੇਦ ਕਿਵੇਂ ਆਊਗਾ ਜੀ ਤਨ ਤਨ ਗੁਰ ਤਨ ਜਨਮ ਇਸ ਤਰ੍ਹਾਂ ਪੜਾਂਗੇ ਹਾਂ ਹਾਂ ਉਹ ਗੁਰ ਗੁਰੇ ਆਈਡੀ ਨਾਲ ਉਸਤਾ ਵਰ ਗਿਆ ਸਾਰੇ ਗੁਰੇ ਹੋ ਜਾਂਦੇ ਨੇ ਅੱਛਾ ਜੀ ਗੁਰ ਗਿਆਨ ਦੇ ਵਾਲਾ ਗੁਰ ਹੋ ਜਾਂਦਾ ਗੁਰੂ ਵੀ ਉਦੋਂ ਹਾਂ ਜੀ ਹਮਮ ਗੁਰੂ ਜ ਕੋਈ ਵੀ ਹੋਵੇ ਉਹ ਜਿਹੜਾ ਗਿਆਨ ਦਿੰਦਾ ਗੁਰੂ ਜਨਮ ਉਹਦਾ ਜਨਮ ਸਭ ਜਨਮ ਵੀ ਤਾਂ ਦੇ ਵਿੱਚ ਕੀ ਭਾਲੇ ਭਲੇ ਵਾਸਤੇ ਗੁਰੂ ਨਹੀਂ ਰੱਖੀਏਗਾ ਤੇ ਭਾਲਦਾ ਭਲਾ ਸੋਚੇ ਹੂੰ ਹੂੰ ਜੋ ਕੁਝ ਵੀ ਤਾਂ ਕਰ ਸਕਦਾ ਸੀ ਉਹ ਹੂੰ ਹੂੰ ਜੋ ਕੁਝ ਵੀ ਕਰ ਸਕਦਾ ਸੀ ਫਿਰ ਉਹਨੇ ਗਿਆਨ ਵੇਚਿਆ ਦੀ ਹੂੰ ਹੂੰ ਸਾੜੇ ਤੁਰਕੇ ਸੈਰੀ ਤੁਰਕੇ ਜਾਦੇ ਲੋਕਾਂ ਦਾ ਭਲਾ ਕੀਤਾ ਨਾ ਹੂੰ ਹੂੰ ਭਾਲੇ ਨਾਲ ਉਹ ਬੰਦੇ ਆਏ ਆ ਉਹ ਤੁਸੀਂ ਲੋ ਜੀ ਤੁਸੀਂ ਇਹਨੂੰ ਉਹਨੂੰ ਕੋਲ ਆਉਂਦੇ ਬਿਚੋ ਵੀ ਲੋੜ ਆ ਜਾਂਦੀ ਨਹੀਂ ਆਪ ਕੇ ਹਮ ਹਮ ਗੁਰੂਬਾਰਾ ਆਪ ਜਨ ਨੇ ਲੋਕਾਂ ਕੋ ਆਪ ਜਨ ਦੇ ਕੋਟ ਕੋਟੇ ਕੱਟੇ ਜਾ ਕੇ ਵੀ ਬੋਲਦੇ ਹੁੰਦੇ ਉਹਨੂੰ ਦੇਖ ਕੇ ਆਤੇ ਹਮ ਹਮ ਕੀ ਇਹ ਕਿਹਦੇ ਚ ਕੋਲ ਕਹ ਰਿਹਾ ਵੀ ਉਹ ਉਹ ਉਹ ਜਾ ਕੇ ਉੱਤੇ ਬੈਠੇ ਨੇ ਉੱਤੇ ਤੋਂ ਪਤਾ ਲੱਗ ਜੇ ਉਹ ਆਪ ਜਨੈਰ ਵੀ ਆ ਜਾਵੇ ਬੇ ਦੇ ਕੋਲ ਹਾਂਜੀ ਤਨ ਤਨ ਗੁਰ ਤਨ ਜਨਮ ਸਖਤ ਭਲੋ ਜਗ ਪਤਾਲਪੁਰੀ ਜੈਕਾਰ ਤੁੰ ਕਬੀ ਜਨ ਕਲ ਵਿਖਾਣੀਓ ਜੈਕਾਰ ਜੈਕਾਰ ਕੋਈ ਕੀ ਹੈ ਹਜ਼ਦਾ ਹੂੰ ਹੂੰ ਪਤਾਲਪੁਰੀ ਮੈਂ ਥੱਲੇ ਵੀ ਜਾਇਆ। ਜਦੋਂ ਇਹਦੇ ਚ ਕਾਲਾ ਆ ਜਾਂਦਾ ਗੁਰੂ ਦੇ ਚਾਰਨ ਪਸੇ ਮੇਰੇ ਇਹਦੇ ਪਤਾਲ ਖੁਦੀ ਦਾ ਵੀ ਹੋ ਜਾਂਦਾ। ਹੂੰ ਗਈ। ਹੂੰ ਹੂੰ। ਚ ਆ ਗਏ ਤਾਂ ਪਤਾਲ ਬਣ ਗਈ ਇਹਨੂੰ। ਹੂੰ ਹੂੰ। ਜਾਂ ਘਾਰ ਤੋਂ ਇੱਥੋਂ ਗਿਆ ਘਾਰ ਤੋਂ ਹੋਈ ਆ ਉੱਥੇ ਬੁਲਦ ਗਿਆ ਗਿਆ। ਗੁਰਬਾਣੀ ਇਹਦੀ ਉਤਪਤੀ ਹੈ ਨਾ ਹੂੰ ਹੂੰ ਹਰਮੈਸ਼ਰ ਜੈਕਾਰ ਤੋਂ ਉਹਦੀ ਜੈ ਹੈ ਨਾ ਹੂੰ ਹੂੰ ਆ ਤਾਂ ਖੁਦ ਹੀ ਉਹ ਜੈ ਤਾਂ ਹਿਰਦੇ ਜੋ ਦੀ ਦਿਰਦੇ ਜੋੜਦੀ ਹੈ ਆਪੇ ਉਹਦੀ ਜੈ ਜੈਕਾਰ ਆਪਈ ਹੁੰਦੀ ਹੈ ਹੂੰ ਵਾਲੀ ਪੈਦਾ ਹੁੰਦੀ ਹੈ ਜੈਕਾਰ ਤੋਂ ਆਪੇ ਪੈਦਾ ਹੁੰਦੀ ਹੈ ਦੇਖੀ ਹੂੰ ਤਿਆਰ ਨਹੀਂ ਹੁੰਦਾ ਜੀ ਬਸ ਬੈਨੇ ਕੋਈ ਬੜੀ ਹੂਦੀ ਹੈ ਫਾਇਦਾ ਹੁੰਦੀ ਕਬ ਜਨ ਕੱਲ ਬਖਾਨਿਓ ਪਾਤਾਲਪੁਰੀ ਕੀ ਜੀ ਕੋਈ ਜਨ ਕੱਲ ਕਬੀਰ ਕੱਲ ਵਸੀ ਬਸਿਆਨ ਜੀ ਤੇ ਉਹਦੇ ਗੱਲ ਫਾਇਦਾ ਹੋਈ ਹੈ ਠੀਕ ਹੈ ਜੀ ਕੋਈ ਗੱਲ ਤਾਂ ਦੱਸ ਰਿਹਾ ਜੱਬੀ ਜੀ ਗੁਰ ਕੀ ਦੱਸ ਰਿਹਾ ਜਿਹੜੀ ਫਾਇਦਾ ਹੋਈ ਹੈ ਉਹ ਦੱਸ ਰਿਹਾ ਪਾਤਾਲਪੁਰੀ ਤੋਂ ਕੀ ਫਾਇਦਾ ਬਣਦਾ ਜੀ ਸਰਦਾ अच्छा जी। ओ जहाज करके चालू तो ਆ ਗਿਆ। हम्म हम्म। ਔਰ ਸਰ ਪੀਜ ਤੇ ਪੈ ਆ ਗਏ, ਪੈਰ ਦੇ ਥੱਲੇ ਦੀ ਜਗਾ ਬੰਦੂ ਜਿਹੜੂ ਕਹਿੰਦੇ ਪਾ ਤਾਲ, ਦੀ ਜਗਾ। ਹਮ। ਫਿਰ ਦੇ ਜਿਆ ਪੈ ਲੈ ਹਮ ਹਮ ਹਲੋ ਠੀਕ ਹੈ ਜੀ ਹਾਂ ਜੀ ਹਾਂ ਜੀ ਸਤ ਅਲਬਾਦ ਹਾਲਕੁਰੀ ਹੈ ਠੀਕ ਹੈ ਜੀ ਹਾਂ ਜੀ ਸਤ ਯੁਗ ਤੈ ਮਾਣਿਓ ਛਲਿਓ ਬਲ 52 ਭਇਓ ਤ੍ਰਿਤੈ ਤੈ ਮਾਣਿਓ ਹਾਂ ਜੀ ਭਾਇਓ ਰਾਮ ਰਗਵੰਸ ਕਹਾਇਓ ਅਜੋਕ ਤੈ ਮਾਰ ਲਿਓ ਹੂੰ ਹੂੰ ਛੱਲਿਓ ਬਾਲ ਹਾਂਜੀ ਪਾਇਓ ਬਾਲ ਵੇਰੂ ਅੱਛਾ ਜੀ ਅਜੋਕ ਤੈ ਮਾਰ ਲਿਓ ਹੂੰ ਹੂੰ ਬਾਲ ਪਾਵਲ ਪਾਇਓ ਹੂੰ ਹੂੰ ਬਾਦੋ ਦੇ ਵਿੱਚ ਹੰਸਾਬ ਤਸੂਰ ਰਹੀ ਟੋਪੀ ਬਾਰੇ ਜੀ ਪਰਤੇ ਨੂੰ ਬਾਹਰ ਹੋ ਗਿਆ ਹੂੰ ਹੂੰ ਆਹ ਨਾ ਤਰਦੀ ਨਾ ਹੂੰ ਹੂੰ ਉਹ ਨਾਲ ਉਹ ਬੁੱਧਵਾਲ ਛਲੇ ਉਹ ਬਲ ਬਲ ਜਿਹੜਾ ਬੁੱਧਵਾਲ ਹੂੰ ਜੋ ਗਾਹ ਆ ਬੁੱਧਵਾਲ ਕਰ ਛਲੇ ਛੋਟਾ ਹੋ ਗਿਆ ਅੱਛਾ ਬਾਵਨ ਮਤਲਬ ਛੋਟਾ ਹੋ ਗਿਆ ਛੋਟਾ ਹੀ ਉਹਦਾ ਬਾਵਨ ਜੋੜੀ ਹੋ ਗਈ ਹੂੰ ਹੂੰ ਇਹ ਬੋਟਾ ਹੋ ਗਿਆ ਤੇਰਾ ਜਿਆਦਾ ਹੋ ਗਿਆ ਆਲ ਵਾਲੇ ਦੇਰੇ ਥੋੜਾ ਅੱਛਾ ਜੀ ਸੱਤ ਥੋੜਾ ਅੱਛਾ ਸੱਤ ਚ ਤਾਂ ਪੂਰਾ ਸੀਗਾ ਗਿਆਨ ਹੈ ਜੀ ਸੱਤ ਯੁਗ ਮਾਣਿਓ ਕਾਲ ਨਾਲ ਹਨੇਰਾ ਛਾ ਗਿਆ ਉਸ ਤੋਂ ਬਾਅਦ ਜਦੋਂ ਹਨੇਰਾ ਛਾ ਗਿਆ ਫਿਰ ਛਲਿਓ ਬਲ ਤੇ 52 ਭਾਇਓ ਹਾਂ ਜੀ ਚੋੜਾ ਹੋਰ ਦੂਰ ਹੈ ਪਰ ਹਟਿਆ ਨਹੀਂ ਮਨੋਂ ਮਾਤੀ ਬਜ਼ੇ ਹੂੰ ਹੂੰ ਪਰ ਅੜ ਗਿਆ ਆਪਣੀ ਉਥੇ ਹੂੰ ਹੂੰ ਅੜ ਗਿਆ ਸੁਪਾ ਅੱਜ ਖੜਾ ਹੋ ਗਿਆ ਬੁੱਧਵਲ ਬਹੁਤ ਥੋੜਾ ਜਿਹਾ ਰਹਿ ਗਿਆ ਹੂੰ ਹੂੰ ਆ ਰਿਹਾ ਬੇਰੇ ਬਾਗਾਂ ਵਾਲਾ ਹੁੰਦਾ ਹੈ ਵੇ ਨਾਲ ਜਾ ਬਟਾ ਹੁੰਦਾ ਹੈ ਇਹਦਾ ਚੋੜਾ ਜਿਹਾ ਬਗਲਾ ਤਾਣਾ ਜੀਤਾ ਜੇ ਜਾਣਾ ਬਗ ਬਪੜਾ ਫੇਰ ਜਲਦੀ ਆਜੋ ਹੂੰ ਹੂੰ ਥੋੜੀ ਅਤਲਾ ਜਿਆਦਾ ਥੋੜਾ ਹੂੰ ਹੂੰ ਚੱਲਿਓ ਬਾਲ ਬਾਲ ਛੁੱਟ ਗਿਆ ਬੰਦਲ ਪੜੇ ਹੂੰ ਹੂੰ ਉਹ ਤੇ ਵੀ ਆਇਆ ਬਾਲ ਛੁੱਟ ਗਿਆ ਬਾਲ ਥੋੜਾ ਰਹਿ ਗਿਆ ਹੂੰ ਹੂੰ ਸਾਹ ਹੀ ਤਾਂ ਬੰਦਲ ਪੜੇ ਨੇ ਤੁਰੇ ਬੰਦ ਪਰ ਮੁੱਕਰ ਗਿਆ ਪਰ ਗਿਆ ਠੀਕ ਹੈ ਜੀ ਪਰ ਬਾਹਰ ਜਾਣ ਕੋਈ ਬਾਈ ਬੜੀ ਗੋਲੀ ਹੈ ਤੇ ਕੋਲ ਆਪਣੀ ਗੁੱਡੀ ਨੂੰ ਵਾਪਸ ਆ ਲੈਣ ਦਾ ਕੋਈ ਜਰੀਆ ਨਹੀਂ ਹੈ ਆਪਣੀ ਗੁੱਡੀ ਆਪਦੀ ਬੁਲਾਈ ਜਾ ਸਕਦੀ ਉਹ ਨਾਲ ਕੋਈ ਹੋਰ ਹੁੰਦਾ ਹੂੰ ਇਹ ਸੋ ਤਾਂ ਕਹਿ ਲੈਣਾ ਪੈਂਦਾ ਸਾਹ ਰੋਦੀਏ ਬਾਹਰ ਗਿਆ ਹੈ ਇਹ ਹੂੰ ਤਾ ਪਾਏ ਪਾਉੜਾ ਦਾ ਓਟ ਹਾਰ ਰਿਹਾ ਅਬ ਤੇ ਹੀ ਓਟ ਹੂੰ ਹੂੰ ਕਾਹਦੀ டியோ ਪਹਿਲਾਂ ਅਸੀਂ ਗਰੀ ਕੰਸਾ ਹੋ ਗਿਆ ਮੇਰਾ ਪਰੂ ਦਾ ਕੰਮ ਲੋਕ ਕਾਈ ਆਂ ਕੋਈ ਨਹੀਂ ਜਾ ਯਾਦ ਕੀਤਾ ਵੀ ਹੈ ਹਮ ਨੇ ਜਦ ਤੈਨੂੰ ਯਾਦ ਕੀਤਾ ਤਾਂ ਤੂੰ ਸੈਟਾ ਤੇ ਆ ਗਿਆ ਲੈ ਹਮ ਹਮ ਦੋ ਪਰ ਉਹ ਗਾਰ ਸੀ ਚਲ ਕੇ ਅੰਤ ਖੇਲਤ ਜਏ ਵੇ ਪਾਸੋਂ ਲੱਗੀ ਕਾਹ ਸਾਨਾ ਮਹਿ ਗਿਆ ਉਹ ਬੈਠੇ ਨੇ ਬਰਾਬਰਾਰੇ ਹਮ ਲੈ ਗਿਆ ਨਾ ਮਿਲਦੀ ਇਹ ਰੋ ਰੋ 42 ਕੋ ਰਾਜ ਸਭਾ ਮੇਰੇ ਰਾਮ ਨਰਨ ਨੂੰ ਕਹਦਾ ਹਾਂ ਫਿਰ ਆਗਰਾ ਨੂੰ ਦੇਖੋ ਜੀ ਆਈ ਉਹ ਇਹ ਤਾਂ ਰਾਹੁਲ ਨੂੰ ਇਹ ਕਹਿੰਦਾ ਕਿ ਸਾਤਾ ਇਹ ਨਹੀਂ ਕਰ ਸਕਦੇ ਸੈਡ ਆਦਮੀ ਕਿਤੇ ਉਹ ਗੱਲ ਕਹਿ ਰਿਹਾ ਇਹ ਇਹ ਨਾਲ ਤੇ ਅੱਛਾ ਜੀ ਉਸ ਦੀ ਵਿਆਖਿਆ ਉੱਥੋਂ ਲੈ ਕੇ ਗੱਲ ਲੈ ਕੇ ਹੈ ਹੂੰ ਜੁਰਗਤੈ ਮਾਣਿਓ ਛੱਲਿਓ ਬਲ 52 ਪਾਇਓ ਹਾਂਜੀ ਬਲ ਆ ਗਏ ਬਲਬੋਤੋ ਬੁੱਤਬਾਲ ਬੁੱਤਬਾਲ ਚਲੇ ਆ ਗਿਆ ਹੂੰ 52 ਪਾਇਓ ਪਾਇਓ ਦਾ ਮਤਲਬ ਹੈ ਥੋੜਾ ਰਹਿ ਗਿਆ ਬਲ ਥੋੜਾ ਜਿਹਾ ਬੁੱਤਬਾਲ ਥੋੜਾ ਜਿਹਾ ਰਹਿ ਗਿਆ ਹੁਣ ਪਾਇਓ ਦਾ ਮਤਲਬ ਚੰਗਾ ਲੱਗਣਾ ਕਿ ਕੀ ਹੋਏਗਾ ਪਾਇਓ ਤੁੰ ਅੱਛਾ ਜੀ ਆਪਣੇ ਆਪ ਨੂੰ ਛੋਟਾ ਹੋਣਾ ਮੰਨ ਲਿਆ ਉਹਦਾ ਉਹਨੂੰ ਬੰਦੇ ਉਹਨਾਂ ਨੇ ਵੀ ਕਿਲਾ ਦਾ ਬਹੁਤ ਮਨਾਤਾ ਤੇ ਜਦੋਂ ਸਭ ਨੇ ਆਉਣ ਕਿ ਸਿੱਖ ਹੂੰ ਹੂੰ ਠੀਕ ਹੈ ਜੀ ਉਹ ਕਮੇ ਦੇ ਦੇ ਆਲਾ ਰਹੇ ਦੱਸੇ ਕਿਲਾ ਪਹਿਲਾਂ ਠੀਕ ਹੈ ਜੀ ਤ੍ਰੇਤੇ ਠੀਕ ਹੈ ਜੀ ਤ੍ਰੇਤੇ ਤੇ ਮਾਨਿਓ ਰਾਮ ਰਗਵੰਸ਼ ਕਹਾਇਓ ਤੇ ਦਾ ਮਾਨਿਓ ਤ੍ਰੇਤਾ ਫੇਰ ਆ ਗਿਆ ਜੋ ਵਸਾਰ ਫੇਰ ਨਹੀਂ ਗਿਆ ਤੇ ਤੂੰ ਹੋਂ ਵਿਚ ਆਇਆ ਹੋਂ ਵਿਚ ਗਿਆ ਲੱਭਦਾ ਰਿਹਾ ਬਰਬੜ ਰਿਹਾ ਰਿਹਾ ਹੰਕਾਰ ਕੇ ਤਿੰਨ ਦਿਨ ਤੋਂ ਕਹਿਣਾ ਪਾਇਆ ਫੇਰ ਦੇਰ ਤੇ ਜਿੰਨਾਂ ਤਰ ਬੁੱਧੀ ਪਰਸੰਦੇ ਬਸਿਆ ਸੱਤ ਕਾ ਖੇਡਾ ਤਿੰਨ ਦਿਨ ਮੈਂ ਦੇਖਿਆ ਤੇ ਡੇਰਾ ਇਹ ਤੇ ਜਾ ਗਿਆ ਜਦੇ ਸ਼ੁਰੂ ਹੋ ਗਿਆ ਤੇ ਤਾਂ ਜਾ ਬਾਬਲ ਹੋ ਗਿਆ ਅੱਛਾ ਰੱਖਿਆ ਗਿਆ ਨਾ ਹੰਕਾਰ ਉਹ ਹੰਕਾਰ ਨੂੰ ਪੈ ਗਿਆ ਪਹਿਲਾਂ ਨਹੀਂ ਸੀ ਰਾਮ ਹਾਂ ਹਾਂ ਬਕਨਾ ਉੱਤੀ ਸਾਰੇ ਰੁਪਰਾਟ ਲੱਗਿਆ ਸੁਖਾਲ ਗਿਆ ਹੂੰ ਹੂੰ ਬਾਕੀ ਦਾ ਵਾਸੀ ਨਹੀਂ ਨੇ ਉਹ ਤਾਂ ਗਿਆ ਅੱਛਾ ਜੀ ਉਹ ਤੇ ਤਾਂ ਰਹੀ ਹੈ ਨਾਲ ਜਿਹੜੇ ਦੇ ਤੇ ਤੇ ਉਹ ਕਹਿੰਦਾ ਗੁੱਤੇ ਸੁਖ ਚਤਤ ਹੂੰ ਹੂੰ। ਕਿਆਰੇ ਜੋਗਰਾਂ ਨਹੀਂ ਗਲਤਾ ਗੋਪਤ ਤੇ। ਅੱਛਾ ਜੀ। ਕਿ ਜੋਗ ਬੰਦੂ ਦੇ ਬਾਹਰ ਆਇਆ। ਤੇ ਨੀ ਉਹ ਗਾਣੀ। ਤੇ ਜੋਗ ਚੌਥਾ ਉਸ ਪਰ ਕਿਆਰੇ ਜੋਗਰ ਨੂੰ ਮਾਇਜ ਬਾਲਦੇ ਫੇਰ ਤੋਂ ਇਹਨਾਂ ਨੇ ਨਾਲਾ ਵਰਸਾ ਪਾੜ ਲੋਤੀ। ਹੂੰ ਉਹਨੂੰ ਕੋਈ ਬਸ ਨਾਮ ਕਰਦੇ ਜੋ ਕੋਲੇ ਆਇਆ ਤੋ ਤਾਂ ਦੇ ਠੀਕ ਹੈ। ਤੋ ਤਾਂ ਉਹ ਜੋ ਗਾਇਆ ਉਹ ਨਹੀਂ ਆਇਆ। ਮੈਨੂੰ ਪਤਾ ਨਹੀਂ ਹੁੰਦਾ ਉਹ ਜੋ ਉਹ ਦਰਦ ਵੀ ਕੋਲ ਸੱਚ। ਹੈ ਉਹ ਜੁਗਾ ਦੇ ਸੱਚ ਹੈ ਉਹ ਤਾਂ ਸਭ ਭੁੱਲ ਗਏ। ਵੀ ਲੱਗਿਆ। ਵਾਹ ਆਹ ਸੱਚ ਉਹ ਹਾਂ ਆਹ ਸੱਚ ਜਿਤਪੁਰਾ ਸੀ ਵਾਲੇ ਦਾ ਜੁਦਾਦ ਸਾਡੇ ਵਿਚ ਆਲੇ ਆ ਲੱਗੇ ਜੋ ਕਿ ਸ਼ੁਰੂ ਹੋ ਗਿਆ ਆ ਗਿਆ ਹੈ ਵੀ ਸੱਚ ਵੀ ਹੈ ਹੁਣ ਵੀ ਹੈ ਸੱਚ ਹਾਂ ਸੱਚ ਉਹ ਵੀ ਸੱਚੀ ਉਹ ਤਾਂ ਬਾਹਰ ਹੀ ਹੂੰ ਜਦੋਂ ਉਹ ਆ ਜੋ ਬੋਲਦਾ ਵਿੱਚ ਹੂੰ ਗੋਪ ਤੇ ਗੁੰਜਾ ਚਤਵਾ ਚੂਕ ਚਤਵਾਰੇ ਕਟਕੜ ਵਰਤਿ ਉਧਰ ਬੁਧਾਰੇ ਬੁਧਾਰੇ ਇਹਦਾ ਹਿੱਸੇ ਵਿੱਚ ਉਧਰ ਨੇ ਜੋ ਬੁਧਾਰੇ ਹੂੰ ਕਟਕੜ ਵਰਤਿ ਵਿੱਚ ਵਰਤਦੇ ਉਧਰ ਬੁਧਾਰੇ ਘੜ ਵਿੱਚ پانی جو جے جو باہر پاورڈ پارٹی خود پانی جو جے پانی بندی تے بندے ہون گے بلیڈنگ کا سال کوتے ہون گے ہمم ਕੋਤਾਏ ਤੋਂ ਬੰਦੀ ਸਕਦਾ ਕਿ ਸਾਡੇ ਮੈਂ ਸਾਡਾ ਪੰਡਾ ਸਾਡੇ ਜੋਗ ਨਹੀਂ ਹੈ ਚਲ ਸਾਡੇ ਜੋਗ ਨਹੀਂ ਪਰ ਤਾਲੇ ਨਾ ਸਾਡੇ ਲੋਕ ਵੀ ਪਰ ਤਾਲੇ ਨਾ ਸਾਡੇ ਸਾਡਾ ਕੁਸ਼ਰੀ ਨਾਮ ਆ ਪਰ ਤਾਲਾ ਮਾਦਾਨਾ ਛਾਪੇ ਪਰ ਤਾਲਾ ਨਾ ਸਾਡੇ ਛਾਪੇ ਪਰ ਤਾਲਾ ਸਾਡੇ ਪਰ ਵੀ ਹੋਰ ਇਹ ਪਰ ਹੋਰ ਹੈ ਰਾਣਾ ਜਰਮਨ ਨੇ ਪੜਨ ਤਾਲੂ ਸਾਡੀ ਗੁਰੂ ਜੀ। ਅਧਰਿਆਨ ਗਿਆਨ ਨੇ ਪੜ ਬਤਾ ਲਓ। ਹਮਮ। ਅੰਦਰ ਬੰਦ ਗਾਹਲੇ ਤੇ ਉਹਦਾ ਗਾਂ ਖੋਤਾ ਦਾ ਨਾ ਖੜਾ। ਹਮਮ। ਇਹਦਾ ਕੋਟੇ ਕੋ ਖਰੇ 20 ਸਾਲ ਹੈ ਖਰੇ 20 ਸਾਲ ਕਿੱਥੇ? ਨੂੰ ਖੜਾ ਗਈ ਜੀ। ਕੀ ਮਸਾਏ ਕਰਦੀ ਜੋ ਟੀਕਾ ਪਾੜ ਨਹੀਂ ਦਿੰਦਾ ਸਾਰੀ ਗਲਤ ਹੈ ਠੀਕ ਹੈ ਬਾਨਾ ਕੋਲ ਹੋਈ अच्छा जी ਜੀ ਅੱਤਨ ਸਰ ਕੋਲ ਸਰ ਕੋਲ ਨਹੀਂ ਪੜਦਾ ਹੂੰ ਹੂੰ ਰੋਕਦਾ ਰੋਕਦਾ ਹੈ ਉਹ ਬੰਦ ਦਾ ਉਹ ਹੀ ਨਿਯਾਕਾਰੀ ਦਾ ਹੈ ਉਹ ਜਿਸ ਦਾ ਸਟਾਫਲ ਅੱਛਾ ਜੀ ਤਾਂ ਇਹ ਆ ਪਰ ਹੈਗਾ ਨਾਲ ਅੱਛਾ ਜੀ ਦੁਆਪ ਉਹਨਾਂ ਦਾ ਨਾਮ ਕੀ ਸੀ ਤਾਂ ਕੋਲਦਾ ਨਾਮ ਉਹ ਠੀਕ ਹੈ ਜੀ ਹਾਂ ਜੀ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕਿਉਂ ਦੁਆਪਰ ਆ ਗਿਆ ਗੜਵਾ ਰਿਹਾ ਅੱਛਾ ਜੀ ਗੜ ਵਿੱਚ ਆਈ ਇਹਨੂੰ ਪੂਰਾ ਹੋ ਰਿਹਾ ਹੈ ਗੜ ਵਿੱਚ ਪਉਗਾ ਪਉਗਾ ਦੇ ਵਿੱਚ ਹੂੰ ਆਪਣੇ ਗਾਰਦ ਅਲੱਗ ਗਲਤੀ ਬਣ ਲੈ ਪਾਣੀ ਚੱਲ ਪਾਣੀ ਚੱਲਣਾ ਸਿੱਖਣਾ ਹੋਊਗਾ ਪਾਣੀ ਚੱਲਣਾ ਸਿੱਖਣਾ ਆਇਆ ਹੋਵੇ ਹੂੰ ਹੂੰ ਤੇ ਪਾਣੀ ਦਾ ਵਿਰੋਧ ਕਰਦਾ ਸੀ ਅੱਛਾ ਜੀ ਵਿਰੋਧ ਕਰਦਾ ਸੀ ਬਹੁਤ ਵਿਰੋਧ ਕਰਦਾ ਸੀ ਹੋ ਗਿਆ ਸੀ ਦਰਦ ਦੇ ਵਿੱਚ ਹੂੰ ਹੂੰ ਦੇ ਲਾੜਾ ਸਾਡੀ ਕਲ ਮਾਇਆ ਉਹ ਦੇ ਨਾਲ ਸੇਵਤੀ ਕਰ ਮਾਇਆ ਉਹ ਕੋਈ ਚੰਨ ਨਾਲ ਸਕਾ ਦੇ ਰਹਿਣਾ ਕੋਲ ਦੇ ਬੈਜਾ ਆਪਣੀ ਬੱਦੀ ਪੈਦਾ ਨਾ ਆਈ ਬੱਦੀ ਕ੍ਰਿਸ਼ਨ ਮੁਰਾਰਤੋ ਕੀ ਭਾਵ ਹੈ ਖਰਾਬੀ ਪੈਦਾ ਹੋਏ ਤੇ ਉਹ ਅੜ ਕਰਦਾ ਕੀ ਭਾਵ ਜੀਨ ਹੋ ਰਿਹਾ ਹੈ ਅੱਛਾ ਜੀ ਬੋਲਦੇ ਹੀ ਕਹਿੰਦੇ ਜੁਣ ਮਨ ਮਰਦਾ ਨਹੀਂ ਰੁਕਣਾ ਨਹੀਂ ਠੀਕ ਹੈ ਜੀ ਹਾਂ ਕੰਸੇ ਕਿਰਤਾਰਥ ਕਿਉ ਕੰਸੇ ਕਰਤਾਰਥ ਕਿਉ ਹੂੰ ਹੂੰ ਆ ਜਿਹੜਾ ਹੈਗਾ ਉਹ ਸਤਾਰਤ ਵਾਸਤੇ ਆਇਆ ਹੈ ਹੂੰ ਆਪਣਾ ਇਹਦਾ ਜੁੱਦ ਕਰਨ ਵਾਸਤੇ ਆਇਆ ਹੂੰ ਅਸਰ ਕਾਂਸੀ ਉਹ ਕੱਲ ਤੋਂ ਰਹਿਣਾ ਹੂੰ ਤੇ ਪਰ ਸਰ ਤਾਂ ਤੁਸੀਂ ਕਾਸ਼ੀ ਜਿਹੜੇ ਵਾਲਾ ਹੈ ਤੇਰੇ ਜਿਹੜੇ ਵਾਲਾ ਅੱਛਾ ਵਾਸਤੇ ਆਇਆ ਭਲਾ ਮੋਹਾਰਾ ਮੈਂ ਪੜਾ ਤੈਨੂੰ ਸਭ ਦਾ ਭਲਾ ਸੋਚੀਗਾ ਸਭ ਦਾ ਭਲਾ ਕਰੂਗਾ ਤਾਇਨਾ ਭਲਾ ਹੋ ਹੂੰ ਜੇ ਪਰਮੇਸ਼ਰ ਸਭ ਦਾ ਭਲਾ ਸੋਚਦਾ ਹੈ ਸਭ ਦਾ ਭਲਾ ਕਰਦਾ ਹੈ ਤੇ ਇਹ ਕੰਮ ਕਰਦਾ ਹੈ ਸਰਕਾਰ ਦਾ ਹੈ ਹੂੰ ਜੇ ਕਰਤਾਰ ਕਰੂਗਾ ਤਾਇਨਾ ਕਰਦਾ ਸੋਚੂਗਾ ਇਹਦਾ ਭਲਾ ਹੋ ਹੂੰ ਕਰੋ ਭਲਾ ਅਗਰ ਕੋਈ ਜਾਨ ਇਹ ਫਿਰ ਉਹ ਜਿਹੜਾ ਬੋਤਾ ਆ ਗਿਆ ਨਾ ਨਾ ਨਾ ਨਾ ਸਾਲ ਭਾਈ ਵੀ ਜਿਹੜੀ ਰੀਡੀ ਕੋਲ ਆਸਲ ਨੂੰ ਦੇ ਫਿਰ ਹੂੰ ਹੂੰ